माया माया कर मुवे माया किसे ਚਲੇ ਉਠ ਡੂਮਣੋ चले उठ डूमणो माया भूलियाथ माया माया कर चले माया माया कर दई चले जाते ਆਇਆ ਕਿਸੇ ਦੇ ਸਾਥ ਨਹੀਂ ਦੇ ਰਹੀ ਕੱਬ ਦੀਆਂ ਰਹੀ ਜੇ ਸਾਥ ਨਹੀਂ ਦੇ ਰਹੀ ਤਾਂ ਕੰਮ ਕੀ ਹੋਣਾ ਠੀਕ ਮਾਇਆ ਤੇ ਰਾਣੀ ਆ ਫਿਰ ਕੰਮ ਨਾਲ ਜਾਣੀ ਉਹ ਨਹੀਂ ਸਾਥ ਇਹਨੇ ਕੰਮ ਕੀ ਜਣ ਆਇਆ ਕਿਸੇ ਨਾਲ ਸਾਥ ਹੰਸ ਚਲੇ ਉੱਠ ਡੂਮਣੋ ਹਾਂ ਹਰ ਸਦੋਮਲੇ ਤੋਂ ਹਰ ਤੇ ਜੋ ਉੱਡ ਜਾਂਦਾ ਮਾਰ ਜਾਂਦਾ ਨਾ ਅੜਾ ਦੀ ਜਿੱਥੇ ਬੈਠਾ ਸਾਹ ਲੈਂਦਾ ਸੀ ਅੱਛਾ ਜੀ ਜਿੱਤੇ ਸਾਹ ਲੈਂਦਾ ਸੀ ਹਾਂ ਮਾਇਆ ਭੁੱਲੀ ਆਤ ਮਾਇਆ ਭੁੱਲੀ ਹੋਤ ਮਾਇਆ ਛੱਡ ਦਿੱਤੀ ਭੁੱਲ ਗਿਆ ਤੇ ਤੋਤੀ ਜਾਂਦਾ ਮਾਇਆ ਠੀਕ ਹੈ ਜੀ ਆ ਡੂੰਮਣਾ ਇੱਕ ਆਪਾਂ ਮੱਖੀਆਂ ਤੇ ਛੱਤੇ ਨੂੰ ਵੀ ਕਹਿੰਦੇ ਆ ਵੈਸੇ ਹਨਾ ਜੀ। ਬਈ ਡੂੰਮਣਾ ਡੂੰਮਣਾ ਡੋਬੜੀ ਦਾ ਕਹਿੰਦੇ ਡੋਬੜੀ। ਬੜੀ ਮੱਖੀ ਦਾ ਲੱਗਿਆ ਹੁੰਦਾ ਛੱਤਾ ਬੜੇ ਉੱਚੇ ਉੱਚੇ ਉਹਨੂੰ ਪੰਜਾਬੀ ਲੋਕਲ ਭਾਸ਼ਾ 'ਚ ਡੂੰਮਣਾ ਕਹਿੰਦੇ ਆ ਵੈਸੇ। ਉਹ ਡੂਬਣਾ ਅੱਛਾ ਇਹ ਡੂੰਮਣਾ ਉਹ ਹੁੰਦਾ। ਅੱਛਾ ਜੀ ਹਾਂ ਨੇ ਉੱਥੇ ਜਿੱਥੇ ਔਂਕੜ ਔਂਕੜ ਜੀ ਡੰਮਣੋ ਮਾਰੇ ਆਪਣੀ ਜਈ ਡੁੱਗੀ ਤਾਂ ਥੋੜੀ ਜਈ ਡੁੱਗੀ ਸਪੇਸ ਨੂੰ ਡੰਮਣਾ ਹੈ ਨਾ ਅੱਛਾ ਜੀ ਥੋੜੀ ਜੀ ਹੋਵੇ ਹੋਵੇ ਟੀਵੀ ਅੱਛਾ ਜੀ ਡੰਮ ਜਿਵੇਂ ਆਪਾਂ ਕਹਿੰਦੇ ਪਏ ਹੋਣ ਸੜਕ ਤੇ ਮਨ ਝੂਠਾ ਜਮ ਜੋਹਿਆ ਅਵਗੁਣ ਚੱਲੇ ਨਾਲ ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਮਾ ਝੂਠਾ ਜਦ ਜੋਇਆ ਮਾ ਝੂਠਾ ਜਨਾਚਨ ਆਬਦੀ ਆਖਾ ਤੇ ਜਿਹੜੇ ਪੁੜਸੀ ਅੱਖੋਂ ਦੀਆਂ ਨਾ 10 ਰੁਪਈਆ ਤੇ ਹੂੰ ਹੂੰ ਨਾਮ ਆਰਵਾਣ ਸਿੱਤੇ ਅਖਰ ਅਖਦਾ ਜਾਂਦੀ ਗ੍ਰਿਫਤ ਵਿੱਚ ਰਹਿੰਦਾ ਹਰ ਵਕਤ ਮੋਦ ਅੱਛਾ ਜੀ ਜਦ ਪਰਮ ਦੀ ਗ੍ਰਿਫਤ ਵਿਚਾਰ ਕੋ ਤੈਨੂੰ ਬੋਲਾ ਨਹੀਂ ਸਕਦਾ ਕਦੇ ਵੀ ਹਮਮ ਆਜੂਗਾ ਜੀ ਛੁਟਾਨੋ ਜਦ ਜੋ ਹੋਇਆ ਵਾਟ ਚੁਗਾ ਜਾਂ ਕਿ ਹੋਇਆ ਆਫਗੁਣ ਚੱਲਣ ਨਾਲ ਜੋ ਜੋ ਆਦ ਦੇ ਆਫਗੁਣਾਂ ਨੂੰ ਨਾਲ ਲੈ ਕੇ ਚੱਲਦਾ ਈ ਪਤਾ ਕਿ ਦਸਤਪੰਡ ਕਰਦੇ ਨਹੀਂ ਉਗੜ ਸਰਕਾਰ ਵਿਰੋਧੀ ਅੰਸਲ ਨਾਲ ਦੇ ਨਾਲ ਰੱਖਦਾ ਲਗੋ ਕੇ ਅੱਛਾ ਜੀ ਇਹ ਕਹਿੰਦਾ ਜਮਾ ਕੁਰਸਾ ਸਰਕਾਰ ਦੀ ਤੇ ਡਿਜ਼ਾਇਰ ਰੱਖਦੀ ਹੈ ਕਿਤੇ ਕੋਈ ਗੜਬੜ ਕਰ ਸਕਦਾ ਹੈ ਲੋਭ ਕਰਕੇ ਕਿਤੇ ਹੀ ਕੋਈ ਪੋੜਾ ਕਰ ਸਕਦਾ ਹੈ। ਜੋ ਕਰ ਸਕਦਾ ਹੈ। ਕਰੋਧ ਕਰਕੇ ਕਿਤੇ ਹੀ ਕੋਈ ਪੋੜਾ ਕਰ ਸਕਦਾ ਹੈ। ਹੂੰ ਹੂੰ। ਕਾਮਨਾ ਇੱਛਾ ਕਰਕੇ ਕਿਤੇ ਹੀ ਕੋਈ ਪੋੜਾ ਕਰ ਸਕਦਾ ਇਹਦੇ ਤੇ ਨਿਸ਼ਾਨ ਰੱਖੀ ਜਾਂਦੀ ਹੈ ਪਰਮੇਸ਼ਰ ਵੱਲੋਂ। ਹੂੰ ਹੂੰ। ਜਨਨਾਗਰ ਨਾਲ ਨਹੀਂ ਵਰਦਾ ਹੈ। ਇਹ ਤਾਂ ਬਿਲਕੁਲ ਉਹ ਚਾਹੇ ਸੰਤ ਵੀ ਹੋਵੇ। ਪਰਮੇਸ਼ਰ ਸਤਿਕਾਰ ਕਰਦਾ ਨੀ ਦੁਨੀਆ ਭਾਵੇਂ ਕਰ ਲਵੇ ਦੁਨੀਆ ਨੂੰ ਠੱਗੀ ਵੀ ਤਾਂ ਹੀ ਕਰਕੇ ਹੀ ਕਰਦਾ ਜਿਹਨਾਂ ਚਲੇ ਅਗੁਣ ਨੇ ਅਗੁਣ ਚੱਲੇ ਨਾਲ ਹਾਂਜੀ ਮਨ ਝੂਠਾ ਜਮ ਜੋਇਆ ਅਬਗੁਣ ਚੱਲਣ ਨਾਲ ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਉਹਨੂੰ ਬਾਨ ਵਰਤੋ ਮਾਰੇ ਇਹ ਇਹ ਮਾਨੂ ਨਾਲਾ ਕੱਲਾ ਮੇਰੇ ਨਾਲੇ ਹੁਦ ਮਾਨੂ ਹੂੰ ਹੂੰ ਉਹਦੇ ਵਿੱਚ ਜਾ ਬੜੇ ਹਾਂਜੀ ਉਹਦਾ ਮੂੰਹ ਟਿਆ ਹੋਇਆ ਉਹਦੇ ਵਿੱਚ ਮੜ ਜਪੇ ਅੱਛਾ ਜੀ ਇਹਦਾ ਜ਼ੈਰੋ ਦੀ ਹੋ ਜਾਂਦਾ ਹਮਮ ਜੇディ ਕੂਝੋ ਦੇ ਮੂਹ ਮਲ ਹੋ ਜਾਂਦੀ ਹੈ ਉਹ ਮੂਹ ਐਨਾ ਪੰਚਕਾਰ ਅੱਛਾ ਜੀ ਉਹ ਬੱਚੇ ਮਰ ਜਾਂਦੇ ਹਮ ਕੋਈ ਰਾਜਾ ਨਾ ਬੰਦ ਹੋ ਰਹਿੰਦੇ ਨਹੀਂ ਮੂਹ ਤੇ ਤੋਂ ਉਲਟੋ ਆਇਆ ਵਰਦਾ ਮਾਣਾ ਹਮ ਹੱਬਾ ਜੱਪ ਦੇ ਵਿੱਚ ਵੜ ਗਿਆ ਛੋਟਾ ਸਭ ਤੋਂ ਬੜੇ ਜਿ ਗਿਆ ਬਸ ਬੱਚੇ ਇੱਕੋ ਹੀ ਰਹਿ ਗਿਆ ਹਮਮ ਉਹੀ ਬੋਲੂਗਾ ਉਹਦਾ ਹੀ ਉਹ ਖਾਊਗਾ ਉਹਦਾ ਤਾਂ ਵੀ ਪਰੇ ਚਲਾ ਗਿਆ ਉਹਦੀਆਂ ਅੱਖਾਂ ਦੇਖ ਕਰੋ ਪਰੇ ਚਲੀਆਂ ਅੱਖਾਂ ਵੀ ਇਹਦੀ ਨਹੀਂ ਇਹਦਾ ਜੀਰਿਆ ਗਿਆ ਦਾ ਕੁਝ ਨਹੀਂ ਰਿਹਾ ਆਪ ਨਾ ਦੇਖ ਸਕਦਾ ਨਾ ਸੁਣ ਸਕਦਾ ਨਾ ਕੋਈ ਖਾ ਸਕਦਾ ਨਾ ਕੋਈ ਪੀ ਸਕਦਾ ਨਾ ਕੋ ਸੋਚ ਸਕਦਾ ਕੁਝ ਵੀ ਕਰ ਸਕਦਾ ਠੀਕ ਹੈ ਇਸ ਕਰਕੇ ਸ਼ੁੱਧ ਮਨ ਜਿਹੜਾ ਹੈਗਾ ਉਹੀ ਹੁਣ ਰਹਿ ਗਿਆ ਅੱਲਾ ਹੀ ਦੁਆ ਖਤਮ ਮਨ ਮਨ ਹੋਰ ਤੋਂ ਪਰੇ ਆ ਉੱਠ ਕੇ ਮਰਦਾ ਠੀਕ ਹੈ ਜਿਹੜਾ ਹਿਰਦਾ ਮਨ ਹੈ ਜੀ ਇਹ ਛੋਟਾ ਮਨ ਨਹੀਂ ਉਹ ਦੋ ਸੱਪ ਨੇ ਜਿਹਨੇ ਸੱਪ ਚ ਦਿੱਖਣੇ ਉਸੇ ਸੱਪ ਚ ਪੜ ਜਾਂਦੇ ਜਾਂਦੇ ਹਮਮ ਬੜੂ ਤਾਂ ਸਰੀ ਪਹਿਲੋਂ ਇਹਨੂੰ ਸਰੀ ਬਾੜੂ ਤਾਂ ਹੀ ਬੜੂ ਹਾਂਜੀ ਕਿ ਜੇ ਬੂਲ ਜਰੇਜ ਹੋ ਗਈ ਠੀਕ ਹੈ ਆ ਕਬ ਇਹ ਨਹੀਂ ਨਾ ਕਦੇ ਮੂਰੇ ਜਲੇ ਗਿਆ ਹਮ ਸਾਰੇ ਗਿਆਨ ਨਿਤਰੋ ਦੇ ਕਾਬੂ ਚਾ ਗਿਆ ਖਤਮ ਹੋ ਗਿਆ ਠੀਕ ਹੈ ਤਾਂ ਵਿਜੂਦ ਖਤਮ ਹੋ ਗਿਆ ਮਾਨ ਮਹਿਮਨ ਉਲਟੋ ਬਣਾ ਇੰਜ ਜੇ ਗੁਣ ਹੋਵੇ ਨਾਲ ਜੇ ਬੂਲ ਹੋਵੇ ਨਾਲ ਅਜੇ ਗੁਰੂ ਨਾਰਾ ਉਗਣ ਛੱਡੇ ਹੁਣ ਤਾਂ ਵੱਡਦਾ ਉਹ ਜੇ ਨਹੀਂ ਉਗਣ ਰੂਪ ਤੇ ਹੀ ਵੱਡਦਾ ਮੇਡਾ ਲੱਗਦਾ ਇਹਨੂੰ ਠੀਕ ਹੈ ਜੀ ਜੇ ਗੁਰਮੁਖਤਾ ਹੋਵੇ ਵੱਡ ਜਾਂਦਾ ਫਿਰ ਕਹਿ ਜੇ ਉਗਣ ਰੂਪ ਕਬੂਲ ਕਰਦਾ ਹੈ ਗੁਰਮੁਖਤਾ ਉਹ ਗੁਰਮੁਖਤਾ ਕਬੂਲ ਕਰਦਾ ਹੈ ਜੀ ਠੀਕ ਹੈ इना संगाने सरद टेटे ओण नहीं सिगने कोई भी गुण नुते पहला ही पास हो से ते पहला ही आओ ऐवे नहीं खड़े हो के तो पहला ही हां जी मेरी मेरी करम हुए बिन दुखपाल गढ़ मंदिर महिला कहां जो बाजी दी बाण ਵੇਰੀ ਮੇਰੀ ਕਰਮੂ ਹਾਂਜੀ ਵੇਰੀ ਮੇਰੀ ਕਰਦਾ ਬਾਰੇ ਬੁਰਗੇ ਵੇਰੀ ਮੇਰੀ ਕਰਮੂ ਹੈ ਬਿਨ ਨਾਮ ਹੈ ਦੁਖ ਭਾਲ ਨਾਮ ਤੇ ਮੇਰਾ ਵੇਰੀ ਮੇਰੀ ਦੁੱਖ ਜੇ ਗਿਆਨ ਤੇ ਮਨਾ ਵੇਰੀ ਮੇਰੀ ਕਰਦਾ ਤਾਂ ਦੁੱਖ ਹੈ ਜੇ ਗਿਆਨ ਦੇ ਵਿੱਚ ਮੇਰੀ ਕਹਿ ਨਹੀਂ ਦਿੰਦਾ ਬਾਰੋਂ ਬੁੱਝ ਚੁੱਕਾ ਹੈ ਬਾਰੋਂ ਬੁੱਝ ਚੁੱਕ ਬੁੱਝੇ ਸਭਈ ਨਾ ਹੈ ਦੀ ਕਹਿ ਦਿੰਦਾ ਸਾਰੀ ਬਾਸ਼ ਵੇਰੀ ਹੈ ਹਾਂਜੀ ਗੜ ਮੰਦਰ ਮਹਿਲਾ ਕਹਾ ਜਿਉ ਬਾਜੀ ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ ਕਾਲ ਬਾਜੀ ਕਾ ਮਹਿਲਾ ਹਾਂਜੀ ਕਾਲ ਪਹਿਲਾ ਬਹਿਲਾ ਇਸਤਰੀ ਗੜ ਮੰਦਰ ਮਹਿਲਾ ਕਹਾ ਆਦਲ ਬੁੱਧਰ ਬਹਿਲਾ ਜੀ ਇਹ ਜੋ ਬਾਜੀ ਦੀ ਬਾਣ ਹੈ ਤੇ ਬਾਜੀ ਹਮਮ। ਤਾਂ ਬਾਜੀ ਖੇਲੀ ਐ ਤੇਰਾ ਤੂਰਾ ਗੋਦਰੀਏ ਚ। ਅੱਛਾ ਜੀ। ਬਾਜੀ ਹਾਰ ਗਿਆ ਗਿਆ। ਹਮਮ। ਮਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸਜਾਨ। ਬਾਦ ਕਾ ਸੱਚੇ ਝੂਠਾ ਆਵਲ ਜਾਣ। ਆਪੇ ਚਤੁਰ ਸਰੂਪ ਹੈ ਆਪੇ ਕੌਣ ਸੁਝਾਉਂਦਾ ਹਾਂਜੀ ਆਪੇ ਜਾਣ ਸੁ ਆਪੇ ਜਾਣ ਸੁ ਜਾਣ ਜਾਂ ਕੋਈ ਸੁਝਾਉਂਦਾ ਸੁ ਹੂੰ ਆਪੇ ਜਨਰਕਾਰ ਹਾਂਜੀ ਆਪੇ ਊਰਜਾ ਪੇਸ਼ ਆਲੋ ਨਾ ਕੋਈ ਪੰਡਤ ਆਲੋ ਕੋਈ ਸਾਲ ਊਰਜਾ ਨਾ ਕੋਈ ਸਾਲ ਸਭ ਕੁਝ ਪਰਤੇ ਪੇਰਾ ਤੂੰ ਕੀ ਚੌਣਾ ਤੇਈ ਖੜਾ ਤੂੰ ਗੁਰਕੇ ਭਾਂਡੇ ਚ ਤੂੰ ਸਿਆਣਾ ਤੂੰ ਆਪਣੇ ਭਾਂਡੇ ਚ ਤੂੰ ਗੁਰਕਾ ਤੇਰੇ ਤੇ ਡਿਪੈਂਡ ਕਰਦਾ ਸਿਆਣਾ ਤੇ ਪੂਰ ਗੁਰਕੋੜਲ ਸਿਆਣੂ ਗੁਰਕੇ ਭਾਂਡੇ ਤੇਰੇ ਵਰਗਾ ਸਿਆਣਾ ਕੋਈ ਨਹੀਂ ਆਪਣੇ ਭਾਂਡੇ ਤੇਰੇ ਵਰਗਾ ਪੂਰ ਕੋਈ ਨਹੀਂ ਹੈ ਲੋਕ ਤੇ ਗੁਰਕਾ ਠੀਕ ਹੈ ਛਤਰ ਸਰੂਪ ਚ ਵੀ ਆਪ ਪਈ ਹੈ ਸੁਜਾਨ ਸਰੂਪ ਚ ਵੀ ਆਪ ਜੀ ਆਪ ਪਈ ਹੈ ਠੀਕ ਹੈ ਜੀ